ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਭਾਨ ਰੂਪ ਸਤ ਜਾ ਕਾ ਸਤ ਅਸਥਾਨ ਸਤ ਹੈ ਇਹ ਸਤ ਸਰੂਪ ਆ ਇਹਦਾ ਸਰੂਪ ਉਹ ਜਾਈ ਰਹਿੰਦਾ ਹਮੇਸ਼ਾ ਇੱਕੋ ਸਾਹ ਰਹੇ ਰੂਪ ਸਤ ਹੁੰਦਾ ਨਹੀਂ ਪੁਰਾਣਾ ਨਾ ਹੋਵੇ ਠੀਕ ਹੈ ਜੀ ਉਹ ਸਤ ਰੂਪ ਇਹ ਜਨਾਬੇ ਵਿੱਚ ਇਹ ਤਾਂ ਜੋਤਵਾਰੇ ਕਿਹਾ ਨਾ ਜੀ ਫਿਰ ਹਾਂ ਹਾਂ ਰੂਪ ਹੈ ਉਹਦਾ ਠੀਕ ਹੈ ਵजूद ਹੈ ਉਹਦਾ ਹਾਂਜੀ ਰੂਪ ਤਾਂ ਹੈ ਅਗਰ ਰੂਪ ਨਹੀਂ ਜਿਵੇਂ ਨੱਕ ਸਾਡਾ ਵੱਖਰਾ ਅੱਖਾਂ ਵੱਖਰੀਆਂ ਡਿਜ਼ਾਈਨ ਨਹੀਂ ਹੈਗਾ ਉਹਦਾ ਠੀਕ ਹੈ ਜੀ ਹਾਂ ਰੂਪ ਸੱਤ ਆਕਾ ਸੱਤ ਅਸਥਾਨ ਆ ਉਹ ਜਿਹੜਾ ਪਿੱਛੇ ਗੱਲ ਕਹੀ ਹੈ ਨਾ ਚੌਥੇ ਪਦਮੇ ਗੱਤ ਪਾਏ ਉਹਦਾ ਉਹਨਾਂ ਦਾ ਸੇਰੂਪ ਕਿਹਾ ਜਾਂਦਾ ਹੈ ਜਦੋਂ ਉਹ ਤੇ ਪੱਛੇ ਚੱਲਿਆ ਗਿਆ ਉਹਦੀ ਉਹ ਹੋਰ ਨੂੰ ਦੱਸਿਆ ਉਹ ਅਰਥ ਵਿੱਚ ਉੱਥੇ ਸਾਰੇ ਇਸੇ ਰੂਪ ਵਾਲੇ ਨੇ ਤਗਤ ਦਾ ਕੀ ਰੂਪ ਹੁੰਦਾ ਰੂਪ ਦੱਸਿਆ ਇਹ ਜਿਦਾ ਸਾਤ ਸਾਨਾ ਉਹਦਾ ਸਾਤ ਸਰੂਪ ਹੁੰਦਾ ਹਾਂ ਜਉਥੇ ਪਾੜਾ ਲੈਦਾ ਠੀਕ ਹੈ ਜੀ ਉਥੇ ਪਾੜੇ ਆ ਪਾਇਉਦੇ ਰੂਪ ਦੀ ਗੱਲ ਹੈ ਇਹ ਠੀਕ ਹੈ ਜੀ ਹਾਂ ਕਾ ਕਾ ਸਤ ਹਾਂ ਪੁਰਖ ਸਤ ਕੇਵਲ ਪ੍ਰਧਾਨ ਆ ਕਰਤੂਤ ਸਤ ਨਹੀਂ ਨਹੀਂ ਪੁਰਖ ਸਤ ਕੇਵਲ ਪ੍ਰਧਾਨ ਪੁਰਖ ਸਤ ਹੈ ਸਤ ਪੁਰਖੇ ਹੀ ਹੈ ਜੀ ਸਤਿਪੁਰਖ ਜਨਿਆ ਆਣਾ ਸਤਿਪੁਰਖ ਜਨਿਆ ਦਾ ਮਤਲਬ ਹੋ ਜਾਣਾ ਇਹ ਸਤਿਗੁਰ ਹੁੰਦਾ ਆਪੇ ਜੋ ਆਤਮਦਰਸੀ ਹੈ ਉਹ ਆਪੇ ਸਤਿਪੁਰਖ ਠੀਕ ਹੈ ਸਤਿਪੁਰਖ ਦਾ ਮਤਲਬ ਇਹ ਹੋ ਗਿਆ ਹਣਾ ਆਪਣੇ ਆਪ ਨੂੰ ਜਾਣ ਲਿਆ ਉਹ ਸਤਿਪੁਰਖ ਹੈ ਇਹੀ ਇਹਦਾ ਅਰਥ ਹੈ ਹੂੰ ਇਹ ਜੀ ਨੇ ਸਤਪੁਰਖ ਜਾਣ ਲਿਆ ਸਤਪੁਰਖ ਕਿਸ ਦਾ ਨਾਮ ਹੂੰ ਹੂੰ ਉਹਦਾਤ ਵੀ ਇਹੀ ਹੈ ਠੀਕ ਹੈ ਸਤਿ ਦੇ ਵਿੱਚ ਆਪਣੇ ਤਾਂ ਮਤਲਬ ਆਪਣੇ ਆਪ ਨੂੰ ਜਾਣਿਆ ਹੋਰ ਕਿਹਨੂੰ ਜਾਣਣਾ ਸੀ ਆਪੇ ਸਤਪੁਰਖ ਹੈ ਹੂੰ ਹੂੰ ਹੁਣ ਇਹ ਹੈ ਉਹ ਆਪ ਹੀ ਸਾ ਆਸ ਰੂਪ ਸਤਪੁਰਖ ਦਾ ਹੁੰਦਾ ਜਿਸ ਨੂੰ ਸਤ ਸਤਿਗੁਰੂ ਕਹਿੰਦੇ ਸਤਪੁਰਖ ਤੇ ਬੜੀ ਕੋਈ ਅਵਸਥਾ ਨਹੀਂ ਹੈ ਸਾਡੇ ਕੋਲ ਕਿਤੇ ਵੀ ਇੱਕ ਬੜੀ ਅਵਸਥਾ ਹੈ ਸਤਪੁਰਖ ਤੇ ਉਹ ਹੁਕਮ ਦੀ ਠੀਕ ਹੈ ਉਹ ਕਹਿੰਦਾ ਸਾਰੇ ਦੇ ਵਿੱਚੋਂ ਦੇ ਸਤਪੁਰਖਾਂ ਨੇ ਸਾਰਿਆਂ ਦੀ ਇੱਛਾ ਦਾ ਹੁਕਮ ਹੈ ਇੰਨੇ ਸੱਤਪੁਰਖ ਨੇ ਸਾਝਕਾਰਨ ਵਿੱਚ ਹੂੰ ਸਾਰਿਆਂ ਦੀ ਕਲੈਕਟਿਵ ਇੱਛਾ ਇੱਕੋ ਇੱਛਾ ਸਾਰਿਆਂ ਦੀ ਉਹਦਾ ਨਾਮ ਹੁਕਮ ਅੱਛਾ ਪਰ ਉਹ ਹੈ ਸ਼ਕਤੀ ਸਰਵ ਸ਼ਕਤੀਮਾਨ ਹੋ ਆ ਉਹ ਇੱਛਾ ਸਰਵ ਸ਼ਕਤੀਮਾਨ ਠੀਕ ਸਭ ਸੱਤਪੁਰਖ ਹੀ ਹੁੰਦੇ ਸੀ ਫਾਕ ਤੇ ਇੱਕੋ ਹੀ ਹੁੰਦਾ ਠੀਕ ਹੈ ਹੁਣ ਇਹ ਨਹੀਂ ਸੱਤਪੁਰਖ ਬਣ ਜਾਣੇ ਉਹ ਤੇ ਪਦ ਵਾਲੇ ਸਤਿਗੁਰ ਖੇਲਦੇ ਨੇ ਠੀਕ ਹੈ ਜੀ ਹਾਂ ਹਾਂ ਜੀ ਪਰ ਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮਾਹੀ ਸਮਾਨੀ ਕਰਤੂਤ ਸਤ ਉਹਦੀ ਜਿਹੜੀ ਕਰਤੂਤ ਘਰ ਜਿਹਨੂੰ ਅਸੀਂ ਕਰਮ ਕਹਿੰਦੇ ਨਾ ਕੋਨੂੰ ਕੁਰਬਾਨੀ ਕਰਵਨੀ ਕਰਦੀ ਕਰਤੂਤ ਮੰਨਦੀ ਹੈ ਠੀਕ ਹੈ ਜੀ ਸੰਸਾਰ 'ਚ ਜੋ ਅਸੀਂ ਕਿਸੇ ਵਾਸਤੇ ਕਰਦੇ ਹਾਂ ਕਰਤੂਤ ਹੈ ਹੂੰ ਕਰਤੂਤ ਪਸ਼ੂ ਕੀ ਮਾਰ ਸਜਾਤ ਇਹ ਕਰਤੂਤ ਸਤ ਕਰਤਾ ਦੀ ਸਰੋ ਪਰਬੂ ਦੀ ਕਰਤੂਤ ਹੈ ਇਹ ਤਾਂ ਤੂਤ ਸੱਤ ਐ ਫਿਰ ਫਿਰ ਉਹਦੀ ਸਤਪੁਰਖ ਵਾਲੀ ਕਰਤੂਤ ਐ ਫਿਰ ਅਸਲੀ ਆਦਮੀ ਵਾਲੀ ਕਰਤੂਤ ਤੇ ਤਾਂ ਵੀ ਕਰਤੂਤ ਕਰਤੂਤ ਸੱਤ ਕਰਤੂਤ ਸੱਤ ਕਿਵੇਂ ਜਾਂਦੀ ਆ ਸੱਤ ਜਾ ਕੇ ਬਾਣੀ ਹੂੰ ਕਿਤੇ ਬਾਣੀ ਬੋਲੀ ਹੋਈ ਸੱਤ ਹੋਵੇ ਗੁਰਬਾਣੀ ਬੋਲੇ ਉਹਦੀ ਕਰਤੂਤ ਸੱਤ ਗੁਰਬਾਣੀ ਸਿਖਿਆ ਦਿੱਤੀ ਐ ਦੂਜਿਆਂ ਨੂੰ ਪਿਛਲਿਆਂ ਨੂੰ ਇਸ ਨੇ ਆਲਾ ਜੀਵਨ ਸਵਾਲ ਨਾਲ ਦੇਣੀ ਈ ਕਰਤੂਤ ਸਤ ਹੈ। ਗੁਰਬਾਣੀ ਦਾ ਉਪਦੇਸ਼ ਦੇਣਾ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਨੂੰ ਸਮਝਾਉਣ ਦਾ ਸੱਤੂਤ ਹੈ। ਸੱਖਿਆ। ਹੈ ਜੀ। ਅਸੱਤ ਬੋਲਨੇ ਤੇ ਬਨਾ ਸੱਚ ਵਿਆਖਿਆ ਕਰੇ ਤੇ ਮੈਨੂੰ ਦਸਤੂਤ ਸੱਤ ਹੋਦੀ ਨਹੀਂ। ਸੱਤ ਬਾਣੀ ਬੋਲੂਗਾ ਸੱਤ ਬਚਨ ਬੋਲੂਗਾ ਤਾਂ ਹੀ ਦੁਜੇ ਨੂੰ ਸੱਤਰੀ ਚਾਹੂਗੀ। ਠੀਕ ਹੈ ਜੀ। ਪਰ ਸੱਤ ਕਹੋਦੀ ਹੈ ਜੇਦੀ ਬਾਣੀ ਸੱਤ ਹੋਵੇ। ਹੂੰ ਜੋ ਸੱਚੀ ਸੱਚ ਦਾ ਨਾਮ ਦਾ ਵਖਿਆਨ ਕਰੇ ਉਹ ਕਰਤੂਤ ਥਾ ਹੈ ਠੀਕ ਹੈ ਜੀ ਭਗਤਾਂ ਨੇ ਸਤਿ ਕਰਤੂਤ ਕੀਤੀ ਹੈ ਹੂੰ ਗੁਰਸੇ ਕਾਣਾ ਜੰਬੇ ਜਿਹੜੀ ਲੱਗੀ ਆ ਨਾ ਹਾਂਜੀ ਹਾਂਜੀ है ਗੁਰਿਆਈ ਦਿੱਤੀ ਸੀ ਗੁਰਿਆਈ ਕੀ ਸੀ ਕਰਤੂਤ ਸੱਚ ਦੀ ਗੁਰਿਆਈ है ठीक है सेवा पास आदि 7 बजे भी 8 बजे भी करतो सत्त है कुर्बानी दी जे करतूत और कुर्बानी जे रजे करतो है बस ठीक है जी ऐसे करके सत पुरुष ने हो बराबर दी है गल ठीक है जी सत पुरुष सब माहे समानी ਸਤਪੁਰਕ ਸਤਪੁਰਕ ਦਾ ਸਾਰਿਆਂ ਚ ਹੂੰ ਹੂੰ ਤੁਗੋਆ ਹੋਇਆ ਫਰਕ ਹੈ ਅੱਛਾ ਜੀ ਅੱਜ ਇਹ ਪੂਰੇ ਦਾ ਫਰਕ ਹੈ ਹੂੰ ਹੂੰ ਜਾਂ ਪੂਰਾ ਵਜਾ ਸਾਡੀ ਘਾਣ ਚਲੇ ਜਾਂਦਾ ਚੌਥੇ ਪਲ ਚਲੇ ਜਾਂਦਾ ਜਾਂਦਾ ਹੁੰਦਾ ਐ ਤੇ ਪਵਾਨ ਲੋਕਾਂ ਚ ਨਾ ਲੋਕਾਂ ਜਾਂਦਾ ਸਤਪੁਰਕ ਕੋਈ ਜਗ੍ਹਾ ਰਹਿੰਦਾ ਜਾ ਸਤਪੁਰਖ ਦਾ ਜਿਹੜਾ ਮਨ ਬੰਦ ਕਰਕੇ ਜਾਦੇ ਰਹਿੰਦਾ ਨਾ ਮਾਇਆ ਵਿੱਚ ਮਾਨਜੋ ਸੁਝਾਇਆ ਪੁਰਖ ਦਾ ਮਤਲਬ ਹੈ ਜਿਹੜਾ ਹੋਂਡ ਜਾਣਾ ਹੈਗਾ ਮਰਦਾ ਦੀ ਕਦੇ ਉਹ ਸਤਪੁਰਖੇ ਹੁੰਦਾ ਠੀਕ ਹੈ ਮਰਗਾ ਦਾ ਵੀ ਹੈ ਨਹੀਂ ਆਦੂ ਕਦੇ ਮਰਦੀ ਆ ਮਰਿਆ ਤੂੰ ਉਹ ਆਤਮਾ ਜਿਹੜੀ ਅਮਰ ਹੈ ਸਤਪੁਰ ਗਿਆ ਉਹ ਪਰ ਕਰਤੂਤ ਸਤਰੀ ਹੈ ਜੀ ਨਹੀਂ ਸਤੂ ਸਤਰੀ ਜੀ ਇਸ ਕਰਕੇ ਮਾਇਆ ਚ ਇਹ ਸਤ ਨਹੀਂ ਤਾਂ ਮਾਇਆ ਦੇ ਵਿੱਚ ਹਾਂ ਜੀ ਕਰਤੂਤ ਜਿਹਨਾਂ ਜਰ ਪਸ਼ੂ ਦੀਆਂ ਮਾਇਆ ਵਿੱਚ ਕਰਤੂਤ ਸਤ ਤੋ ਵੀ ਸੱਤ ਬਾਣੀ ਹੋਗੀ ਫਿਰ ਮਾਇਆ ਦੇ ਭਰੇ ਚੌਥੇ ਪਦ ਵਿੱਚ ਹਾਂ ਸਹੀ ਬਦਲਨੀ ਹੈ ਠੀਕੀ ਬਦਲਨੀ ਹੈ ਸੰਸਾਰ ਦੇ ਦੇ ਵਿੱਚ ਕੁਝ ਨਹੀਂ ਫਰਕ ਪੈਣਾ ਠੀਕ ਹੈ ਜੀ ਬਦਲਾਅ ਜੇ ਆਉਣਾ ਸਿਰਫ ਮਨ ਵਿੱਚ ਆਉਣਾ ਮਨ ਵਿੱਚ ਬਦਲਾਅ ਆਉਣਾ ਪਤਾ ਕਿਸੇ ਨੂੰ ਪਤਾ ਨਹੀਂ ਕਿ ਬਦਲਾਅ ਆਉਣਾ ਉਹਨੂੰ ਹੀ ਲੱਗਦਾ ਦੁਆ ਦੁਨੀ ਲੱਗਣਾ ਆ ਕੋਈ ਦੁਆ ਹੋਵੇਗਾ ਹਰੂਲ ਜੇ ਲਾਹੇ ਕਿ ਬਦਲਾਅ ਤਾਂ ਆਨੁਗੂਪਤ ਲੱਗਿਆ ਸਿਰਫ ਹੋਰ ਕਿਸੇ ਨੂੰ ਨਹੀਂ ਪਤਾ ਲੱਗਿਆ ਤੋ ਗਾਣ ਲਗਾ ਸੀ ਉਹ ਬੋਲ ਰਿਹਾ ਸੀ ਹਾਂਜੀ ਹਾਂ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪੱਤ ਸਤ ਕਰਮ ਹਾਂ ਉਹਨੇ ਤੇ ਕਰਮ ਆ ਗਿਆ ਦਰਦੂਦ ਦੇ ਥੋਂ ਅੱਛਾ ਜੀ ਜਾਕੀ ਰਚਨਾ ਸਤ ਸਤ ਉਹਤੇ ਕਰਮ ਵੀ ਕਰਮ ਜਿਹੜਾ ਹੁੰਦਾ ਨਾ ਕਿਰਪਾ ਹੁੰਦੀ ਹੈ। ਜੇਰ ਪਾਵੀ ਸੱਚੇ ਵੀਰ ਦੀ ਹਜ਼ਰ ਤੇ ਪਰਮੇਸ਼ਰ ਦੀ ਆਪੇ ਕਿਰਪਾ ਹੁੰਦੀ ਹੈ। ਠੀਕ ਹੈ ਕਿਰਪਾ ਸਤਿ ਕਰਪਾ ਕਰਮ ਸੱਤ ਕੀ ਹੈ। ਕਰਮ ਦਾਤਾ ਉਹਨੂੰ ਆਮੜਾ ਠੀਕ ਹੈ ਜੀ। ਉਹਨੂੰ ਰਾਤ ਦੇ ਪੇਟਾ ਜਿਹੜਾ ਸੰਸਾਰੀ ਧਰਮ ਹੈ ਨਾ ਉਹ ਨਾਰੀ ਤਾਂ ਨੇ ਦੌਲਤ ਹੈ ਧਾਰਥ ਦੇ ਇਹ ਸਾਤ ਕਰ ਬੁੱਢੀ ਹੈ ਫਿਰ ਪਾਤਾ ਹੋਈਏ ਜੰਦ ਉੱਤੇ ਪਰ ਝੂੜ ਸੀ ਵਰਖਾ ਹੋਈਏ ਉੱਤੇ ਇਹ ਕਰਕੇ ਤੁਹੋਂ ਕੱਢਦੀ ਗੁਗਿਆ ਨਾਮ ਪ੍ਰਭੂ ਦਾ ਕਦੇ ਕਰਮਿਆ ਕਰਨਾ ਤਾਂ ਸੱਤ ਕਰਮ ਕਰਦਾ ਤੇ ਜਿਦਾ ਹਮੇਸ਼ਾ ਰਹੇ ਮਾਇਆ ਦਾ ਕੀ ਆ ਜ ਮਾਇਆ ਹਰ ਹੀ ਕਾਲ ਉਹ ਤਾਂ ਉਹ ਤਾਂ ਕਹਿੰਦੇ ਖੋਲਣ ਦਾ ਕਹਿੰਦੇ ਤੇ ਅਹਜ ਤੱਕ ਤਬਾਹ ਹੋ ਲਾ ਰਾਮੇ ਤਾਂ ਕਹਿੰਦੇ ਰਕਬਲਾਂ ਦਾ ਤਾਂ ਨਤੂ ਇਹ ਜਿਹੜਾ ਕਰਮ ਸੱਤ ਆ ਇੱਕ ਵਾਰ ਬੰਖਤ ਬਣਾਤਾ ਸੋਈ ਵਾਰ ਗੁਰੂ ਕੋ ਪਿੱਛੋਂ ਜਾਂਦੇ ਸੱਤ ਦਾਦੀ ਬੈਠੇ ਤੈਗਦਾ ਹੋ ਇਨਾਕ ਸੰਦੇਕੇ ਘੋਦਾ ਦੀ ਦੁਆ ਦੇਕੇ ਖੋਪੀ ਲੱਗਦਾ ਠੀਕ ਹੈ। ਜਦੋਂਕਾ ਨਾ ਅੰਤਾਰੀ ਜੇ ਤਾਂ ਉਹ ਜੇ ਅੰਤਾਰੀ ਜੇ ਤਾਂ ਖੋਲ ਜਾਂਦਾ। ਬਿਚੂ ਕਰੇ ਤਾਂ ਖੋਲਦਾ ਇਹ ਜਿਹਨੂੰ ਨਾਮ ਬਰਦਾ ਉਹ ਉਹ ਤਾਂ ਖੋਲ ਜਾਂਦਾ। ਠੀਕ ਹੈ ਜੀ। ਖੋਲਣ ਦੇ ਕਈ ਕਾਰਨ ਹੁੰਦੇ ਨੇ ਨਾਮ ਦੇ ਕੇ ਕਰੇਗੇ ਸਿਰ ਤੇ ਕੋਈ ਠੀਕ ਹੈ ਜੀ। मेरा नाम तेरा फिर कभी खोया जी नाम तो वो लदादी खोया कर्म है, जाकी, रत, रचना आ, कर्म है। जाकी रचना स आ कीड़ा कर्म कर सत जाकी रचना सत मेरा रजिया ए रचना की में की है ਆਪ ਟਵਲਪ ਕਰਕੇ ਲਿਆਇਆ ਇਹ ਮਿੱਠਾ ਕੀਬ ਦੂਰ ਹੈ ਅੱਕੇ ਨੀਆਂ ਜੋ ਬਾਹਰ ਕਰਕੇ ਲਿਆਇਆ ਹੁਕਮ ਦੇ ਨਾਲ ਆਪਣੇ ਨਾਲ ਅੱਜ ਇੱਥੇ ਆ ਕੇ ਬਾਹਰ ਹਿਲਾਉਂਦਾ ਥੱਲੇ ਤੋਂ ਆਇਆ ਹੈ ਜੁੜਿਆ ਆਇਆ ਆ ਜੀ ਤੇ ਆ ਕੇ ਅਲ ਗਿਆ ਆਪਣਾ ਨੇ ਲੜ ਸਕਦਾ ਉਹਦਾ ਹਾਂਜੀ ਮੂਲ ਸੱਤ ਸਤ ਉਤਪਤ ਸਤ ਉਤਪਤ ਮੂਲ ਸ਼ਰਧਿਕਾ ਦੀ ਹੈਦਾ ਸੱਚੇ ਹੋਣਾ ਸੀਦਾ ਆ ਸੱਤ ਪੈਦਾ ਕਿੰਮ ਭਇਓ ਤੋ ਸੱਚੇ ਪੈਦਾ ਹੂੰ ਜਿਹਦੇ ਕਰ ਉਤਪਤ ਕਹਿ ਰਸੇ ਪੈਦਾ ਕੀ ਹੋਇਆ ਸਤ ਇੱਕੋ ਇਹ ਦੱਸ ਕੇ ਹੋ ਗਿਆ ਜੋ ਹੋ ਗਿਆ ਉਹ ਸਤ ਠੀਕ ਹੈ ਜੀ ਸਾਡੀ ਦਾ ਸਾਡੀ ਪੈਦਾ ਹੋਇਆ ਅੰਦਰ ਹਾਂ ਜੀ ਇਹ ਕੋ ਕੇ ਹੋ ਉਹ ਸਤ ਹੋ ਗਿਆ ਹਾਂ ਜੇ ਕੇ ਉਹ ਗਦਾ ਉਹ ਹੀ ਸਤ ਉਤਪਤ ਹੈ ਹਾਂ ਜੀ ਸਰੀਰ ਮਾਇਆ ਦੇ ਉੱਤੇ ਕੀ ਹੈ ਠੀਕ ਹੈ ਜੀ ਸਤ ਕਰਣੀ ਨਿਰਮਲ ਨਿਰਮਲੀ ਜਿਸੇ 부ਝਾਏ ਤਿਸੇ ਸੱਚ ਹੈ ਨਾ ਤਾਂ ਸੱਚ ਪੈਦਾ ਹੁੰਦਾ ਹੈ ਕਰਣੀ ਸੱਚ ਕਰਣੀ ਹੋ ਜਾਂਦੀ ਹੈ ਭਗਤਾਂ ਨੇ ਸੱਚੀ ਰਹੀ ਹੈ ਹਾਂ ਪੱਜ ਵੀ ਕਰਤ ਕੀਤੀ ਸੱਚੇ ਖਾਇਆ ਸੱਚੇ ਖੱਤੇਆ ਸੱਚੇ ਖਾਧਾ ਸੱਚੇ ਪੈਦੇ ਤੇ ਉਕੇ ਸੱਚੇ ਕਮਾਣਾ ਸੱਚੇ ਖਾਣਾ ਸੱਚੇ ਪਹਿਲ ਸੱਚੇ ਕਥਾ ਕਰਨਾ ਸੱਚੇ ਬਣਨਾ ਲੋਕਾਂ ਨੂੰ ਸੱਚੇ ਲੈਣਾ ਸੱਚੇ ਦੇਣਾ ਠੀਕ ਮੰਨੀ ਹਾਜੀ ਸਤ ਕਰਨੀ ਨਿਰਮਲ ਨਿਰਮਲੀ ਜਿਸੇ 부ਝਾਇ ਤਿਸੇ ਸਭ ਭਲੀ ਕਰਨੀ ਨਿਰਮਲ ਨਿਰਵਿਰੀ ਜਿਹੜਾ ਬੋਲ ਤੇ ਬੋਲ ਲਈ ਜਿਵੇਂ ਬੋਝਾਇਆ ਤੇ ਸਰ ਸਭ ਪਰੀਜੋ ਸਮਝ ਆ ਜਾਂਦੇ ਠੀਕ ਹੈ ਜੀ ਉਹਦਾ ਭਲਾ ਹੀ ਭਲਾ ਫਿਰ ਹਾਂ ਜੀ ਉਹਦਾ ਭਲਾ ਹੁੰਦਾ ਜੀ ਉਹ ਸਭ ਚੰਦਰੀਆ ਜਿਹੜਾ ਲੈਂਦਾ ਠੀਕ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਹਤਨਾਮ ਪ੍ਰਭ ਕਾ ਸੁਖਦਾਈ ਜਿਹੜਾ ਪ੍ਰਭ ਨਾਮ ਹੈ ਸਭ ਹੋ ਹਨੀ ਉਹ ਵਾਸਤਾ ਆ ਡਾਲਾ ਹੁਕਮ ਹੂੰ ਹੁਕਮ ਆ ਡਾਲਾ ਤੇ ਉਹ ਕੋ ਗਿਆ ਹੂੰ ਪਰ ਸੁਖਦਾਈ ਆ ਸੁਖ ਵਾਸਤੇ ਸੁਖ ਵਾਸਤੇ ਵੀ ਨੇ ਸਦਾ ਸੁਖਦਾਈ ਜਿਹੜਾ ਹੁਕਮ ਨਾਲ ਜੁੜੀ ਹੋਏ ਸੁਖਦਾਈ ਹੈ ਜਿਹੜੇ ਮਾਇਆ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਹੁਕਮ ਦੁਖਦਾਈ ਲੱਗਦਾ ਦੁਖਦਾਈ ਹੁਕਮ ਕਿਹਨੂੰ ਲੱਗਦਾ ਜੇ ਲੋਹ ਮਾਇਆ ਨਾਲ ਜੁੜੇ ਹੋਏ ਨੇ ਠੀਕ ਹੁਕਮ ਨਾਲ ਜੁੜਿਆ ਨਾ ਦੁਖਦਾਈ ਲੱਗਦਾ ਤੇ ਦੁਖਦਾਈ ਆ ਦੁਖਦਾਈ ਦਾ ਇੱਦਾਂ ਹੀ ਫਰਕ ਹੈ ਕਿ ਤਾਂ ਹੁਕਮ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਦੁਖਦਾਈ ਲੱਗਦਾ ਜਿਹੜੇ ਜ਼ਮੀਨ ਨਾਲ ਜਿਹੜੇ ਮਾਇਆ ਨਾਲ ਜੁੜੇ ਉਹਨਾਂ ਨੂੰ ਦੁਖਦਾਈ ਲੱਗਦਾ ਆ ਇਹਦਾ ਇੱਧਰ ਦੇ ਉੱਤੇ ਬੈਠਾ ਨਾ ਮੂਰੇ ਹਾਂਜੀ ਰੇਲ ਦੇ ਤੇ ਜਿਹਦੇ ਵਾਦੀ ਦੌੜੇ ਉਹਨੂੰ ਤੇ ਖੜਾ ਹੈ ਹੂੰ ਟਕੜਾਉਦਾ ਨਾ ਹੁਕਮ ਤੇ ਅਸੀਂ ਤਾਂ ਮੂਰੇ ਖੜੇ ਨਾ ਉਹਦੇ ਆਪਣਾ ਹੁਕਮ ਨਹੀਂ ਠੀਕ ਹੈ ਮਾਇਆ ਤਾਰੀਆਂ ਵਾਸਤੇ ਦੁਖਦਾਈ ਕਰਦਾ ਅਸੀਂ ਖੁਦ ਵਿਰੋਧ ਚ ਖੜੇ ਨਾ ਤਾਂ ਤੁਹਾਨੂੰ ਲੱਗਦਾ ਜਿਹੜਾ ਰਾਹ ਰੋਕੀ ਖੜਾ ਲਾਈ ਦੇ ਉੱਤੇ ਉਹਦੇ ਨਾਲ ਨਾਲ ਰੇਲ ਦਾ ਉਹਨਾਂ ਦੁਖਦਾਈ ਹੈ ਗੁਰੂ ਮਾਰਨ ਚੱਕੇ ਪਰੇ। ਹੂੰ। ਤੇ ਉਹਦੇ ਵਾਸਤੇ ਜੀ ਉਹਦੇ ਵਿਰੋਧ 'ਚ ਖੜੇ ਨੇ। ਉਹ ਉਹਦੇ ਵਾਸਤੇ ਜਿਹੜਾ ਉਹਦੇ ਨਾਲ ਚੱਲ ਰਿਹਾ ਹੁਣ। ਸਾਥ ਚੱਲਦੇ ਆ। ਹਾਂਜੀ ਵਿਸ਼ਵਾਸ ਸਤਨਾਨਕ ਗੁਰ ਤੇ ਪਾਈ ਇਹ ਕਿ ਵਿਸ਼ਵਾਸ ਹੁਕਮ ਤੇ ਕਰਨਾ ਹੁਕਮ ਤੇ ਜੇ ਵਿਸ਼ਵਾਸ ਨਹੀਂ ਕਰਦੇ ਤਾਂ ਜੁੜਦੇ ਨਾਲ ਹੁਕਮ ਤੇ ਸਾਹਮਣੇ ਭਰੋਸਾ ਨਹੀਂ ਤਾਂ ਦੀ ਜੁੜਦੇ ਨਾਲ ਕਿਹਦੇ ਵਿਸ਼ਵਾਸ ਕਰ ਲੈ ਹੁਕਮ ਤੇ ਹੁਕਮ ਨਾਲ ਜੁੜ ਕੇ ਉਹਦੇ ਵਾਸਤੇ ਸੁਖਦਾਈ ਸੁਖਦਾਈ ਆ ਦੁੱਖदाई ਹੁੰਦਾ ਤਾਂ ਇਹ ਵਿਸ਼ਵਾਸ ਸਤ ਨਾਮਕ ਗੁਰਤੇ ਪਾਈ ਵਿਸ਼ਵਾਸ ਜਿਹੜਾ ਹੁੰਦਾ ਹੈ ਗਿਆਨ ਹੁੰਦਾ ਜਦੋਂ ਸਮਝ ਆਉਂਦੀ ਹੈ ਫਿਰ ਵਿਸ਼ਵਾਸ ਹੁੰਦਾ ਇਹਨੂੰ ਵਿਸ਼ਵਾਸ ਹੋ ਕੇ ਉਹਦੇ ਵਾਅਦੇ ਸੁਖदाई ਆ ਜਿਹਨੂੰ ਵਿਸ਼ਵਾਸ ਨਹੀਂ ਹੁੰਦਾ ਦੁਖदाई ਇਹ ਗਿਆਨ ਤੋਂ ਸਖਰਿਆਂ ਨੂੰ ਦੁਖदाई ਆ ਗਿਆਨਵਾਨਾਂ ਨੂੰ ਸੁਖदाई ਆ ਜਾਂ ਤੋਰ ਸਤਿਆਨ ਨੂੰ ਤੁਖਦਾਈ ਆ ਗੁਰਮਤਿ ਦੀ ਸੋਝੀ ਵਾਲਿਆਂ ਨੂੰ ਸੁਖਦਾਈ ਹੋਇਆ ਹੁਕਮ ਉਪਦੇਸ਼ਾ ਠੀਕ ਹੈ ਜੀ ਗੁਰਮੁਖਾਂ ਸਤਨਾਮ ਮੱਖਣ ਨੂੰ ਹੁਕਮ ਮੰਨਾਂਗੇ ਇੱਥੇ ਅੱਛਾ ਜੀ ਪਰ ਜਿੱਥੇ ਉਹਦਾ ਸਤਨਾਮ ਤੇਰਾ ਪਰਾਪੁਰਬਲਾ ਉਹ ਲੱਗ ਉੱਥੇ ਵੀ ਹੈ ਜਿਹੜਾ ਤੇਰਾ ਨਾਮ ਹੈ 7 ਤੈਨੂੰ 7 ਕਿਹਾ ਹੂੰ ਇਹ ਜਿਹੜਾ ਨਾਮ ਤੇਰਾ ਰੱਖਿਆ ਨਾ 7 ਤੈਨੂੰ 7 ਕਹਿੰਦੇ ਨੇ ਬਲਾ ਹੂੰ ਇਹ ਗੋਲ ਤੇਰਾ ਪਰਾਪੂਰ ਬਲਾ ਹੂੰ ਬਦਲਵਾ ਇਹਦੇ ਨਾਲ ਇਹਦੇ ਨਾਲ ਤੇਰਾ ਕੋਈ ਕਰਮ ਦਾ ਸੁਭਾਅ ਨਹੀਂ ਹੈ ਦਿਆਲੂ ਤੂੰ ਹਾਂ ਦੇ ਆ ਕਰਕੇ ਦਿਆਲੂ ਹੱਥਾਂ ਦਾ ਤੇਰਾ ਜਗਵੀ ਸੀ ਹੱਥਾਂ ਦਾ ਜਗਵੀ ਕਹਿੰਦੇ ਠੀਕ ਹੱਥਾਂ ਦਾ ਜਗਵੀ ਕਹਿੰਦੇ ਯਾ ਜਨਾ ਹੈ ਨਹੀਂ ਸੀ ਹੂੰ ਹੂੰ ਲਾ ਜਨਾ ਤੋਂ ਬਾਅਦ ਜਿਹੜੇ ਤੈਨੂੰ ਬੋਲ ਜਿਹੜੇ ਜੇਬਾ ਕਿ ਨਾਮ ਕਰੇ ਤੇਰੇ ਜੇਬਾ ਹੂੰ ਇਹ ਵਾਤਮਨ ਜਿਹੜੇ ਤੇਨੂੰ ਨੋ ਨਖਣੇ ਕਰ ਤਬ ਸਤਨਾਮ ਆਤਮਾਵਤਾਰ ਸਤਿ ਸਤਿ ਤੇ ਇਸ ਕਰਕੇ ਰੱਖਿਆ ਤੁਸੀਂ ਜਿਹੜੇ ਦਰ ਤੂੰ ਠੀਕ ਹੈ ਹਮੇਸ਼ਾ ਰਹੇ ਸਾਡੇ ਤੇ ਕੋਈ ਦੇਹਗਾ ਤੂੰ ਦੁਲਦੀ ਹੈ ਜੀਵ ਨਾਲ ਕੋਈ ਰਿਲੇਸ਼ਨ ਨਹੀਂ ਤੇਰਾ ਤੇ ਤੇਰਾ ਆਪਣਾ ਹੋਵੇ ਤੇਰਾ ਅਰਥ ਇਹ ਹੈ ਕਿ ਜਿਹੜੇ ਬਣਨ ਅਚਾ ਦੂਸਰਾ ਇਹ ਹੈ ਵੀ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਲਿਖਿਆ ਪਾਈ ਤਾਂ ਲਿਖਿਆ ਕਿਉਂਕਿ ਉੱਪਰੋਂ ਜਿਹੜੀ ਹੈਗੀ ਕਾਫੀਆਂ ਮਲਾਉਣਾ ਸੀ ਨਹੀਂ ਤਾਂ ਪਾਇਆ ਨਹੀਂ ਹੋਣਾ ਚਾਹੀਦਾ ਵੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਲਿਗਿਆ ਪਾਈ ਜਾਂ ਪਾਇਆ ਪਾਈ ਅੱਛਾ ਜੀ ਵਿਸ਼ਵਾਸ ਪਾਇਆ ਇਹ ਦੋਏ ਜਿਹੜੇ ਗੁਰਵਾਚ ਕਹਿੰਦੇ ਲੱਗ ਜਾਂਦੇ ਨੇ ਕਾਫੀਆਂ ਮਲਾਉਣ ਵਾਸਤੇ ਪਾਈ ਲਿੱਤਾ ਕੀ ਗੱਲ ਵਿਕਾਸ ਫਾਇਰ ਦੇ ਸਾਹ ਹੋਇਆ